ਸ਼ਲੋਕ ਮਹੱਲਾ ਤੀਜਾ ਬਾਬੀਹਾ ਖਸਮੇ ਕਾ ਮਹਿਲ ਨ ਜਾਣ ਹੀ ਮਹਿਲ ਦੇਖ ਅਰਦਾਸ ਪਾਏ ਆਪਣੇ ਭਾਣੇ ਬਹੁਤਾ ਬੋਲਣ ਬੋਲਿਆ ਥਾਇ ਨਾ ਪਾਏ ਪਹਿਲਾਂ ਤਾਂ ਇਹ ਬਾਹਲੇ ਮਹਿਲੇ ਮਹਿਲ ਬਣਾਈ ਬੈਠਾ ਜੇ ਮਹਿਲ ਜਾਣ ਲੈਂਦਾ ਦੇਖ ਲੈਂਦਾ ਮਹਿਲ ਦੇਖ ਅਰਦਾਸ ਪਾਈ ਤਾਂ ਮਹਿਲ ਦੇਖ ਲੈਂਦਾ ਫੇਰ ਕੀ ਪ੍ਰਾਪਤ ਹੁੰਦੀ ਆ ਫਿਰ ਅਰਦਾਸ ਪ੍ਰਾਪਤ ਹੁੰਦੀ ਹੈ ਗੁਰਬਾਨੀ ਜਿਹੜੀ ਹੈ ਹਰ ਕੀਰਤਬੀ ਰਹਿਣਾ ਫਿਰ ਕੀਰਤੀ ਕਰਦਾ ਉਸ ਮਹਿਲ ਦੀ ਔਰ ਮਹਿਲ ਦੇ ਮਾਲਕ ਦੀ ਫਿਰ ਅਰਦਾਸ ਭਾਈ ਆਪ ਬਹੁਤ ਛੋਟਾ ਬਣ ਜਾਂਦਾ ਹੈ ਐਨਾ ਛੋਟਾ ਹੋ ਜਾਂਦਾ ਜੀ ਤਾਂ ਛੋਟਾ ਕੋਈ ਹੁੰਦਾ ਹੀ ਨਹੀਂ ਦਾਸ ਦਾ ਫਿਰ ਬੋਲਦਾ ਜਿਨਾ ਚਿਰ ਮਹਿਲ ਬਾਲਲੇ ਮਹਿਲਾਂ ਨੂੰ ਮਹਿਲ ਜਾਣਦਾ ਉਹਨਾਂ ਚਿਰ ਹੰਕਾਰ ਚਲੇ ਅਰਦਾਸ ਭਾਈ ਨਾਲ ਸਰਕਾਰ ਬਿਲਕੁਲ ਹਮੇਸ਼ਾ ਵਾਸਤੇ ਚਲਾ ਗਿਆ ਜੀ ਦਾ ਆਪਣੇ ਭਾਵੇਂ ਬਹੁਤਾ ਬੋਲਿਆ ਔਰ ਬੜੇ ਬੜੇ ਤੁੰਕ ਲਿਖ ਦਿੱਤੇ ਕਵੀ ਦਾ ਵੀ ਪਹਿਲਾਂ ਬਹੁਤ ਬੜਾ ਬੀਜ ਲਿਖ ਦਿੱਤਾ ਉਹ ਆਪਣੇ ਕਾਢੀ ਲਿਖਿਆ ਉਹਨੇ ਬੋਲਿਆ ਥਾਂ ਭਾਈ ਪਰ ਉਹ ਬੋਲ ਜਿਹੜਾ ਸੀ ਰਿਵਾਜ ਪਰਵਾਣੀ ਹੋ ਸਕਿਆ ਇਸ ਕਰਕੇ ਉਹ ਲੋ ਬੋਲਿਆ ਆਪੇ ਰੱਦ ਕਰਕੇ ਫੇਰ ਪੱਕੀ ਬਾਣੀ ਜਿਹੜੀ ਗੁਰੂ ਰਣ ਸਾਹਿਬ ਉਹ ਦੁਬਾਰਾ ਬੋਲੀ ਤੇ ਕਹਿ ਦਿੱਤੇ ਸਰ ਜਨ ਸਿਪੂਰੀ ਕੋ ਚੇਪਰੀ ਜੋ ਮੈਂ ਬੋਲਿਆ ਸੀ ਉਹ ਸਾਰੇ ਜਨਮ ਦਾ ਆਇਆ ਨਹੀਂ ਆਇਆ ਹੀ ਬੋਲਿਆ ਜਿੰਦਗੀ ਵੀ ਆ ਜਾਣਗੇ ਉਹ ਥਾਂ ਨਹੀਂ ਪੈਂਦਾ ਉਹ ਸੱਚ ਤੇ ਖਰਾ ਨਹੀਂ ਉਤਰਦਾ ਸੱਚ ਦੀ ਖਸੌਤੀ ਤੇ ਖਰਾ ਨਹੀਂ ਉਤਰਦਾ ਹੈ ਕਿਨੇ ਕਵੀ ਕਵਿਤਾ ਕਰਦੇ ਨੇ ਲਿਖਦੇ ਨੇ ਜਿਨ੍ਹਾਂ ਦੀਆਂ ਲੋਕ ਗੱਲਾਂ ਕਰਦੇ ਨੇ ਮਸਕੀਨ ਵੀ ਗੱਲਾਂ ਕਰਦਾ ਰਿਹਾ ਉਹ ਥਾਂ ਹੀ ਨਹੀਂ ਪਿਆ ਹੋਇਆ ਪੱਕੀ ਬਾੜੀ ਦੀ ਹੈ ਉਹ ਉਹ ਭਾਈ ਗੁਰਦਾਸ ਜੀ 12 ਫੀਓ ਦੇ ਵਿੱਚ ਆਇਆ ਗੁਰਬਾਣੀ ਦੀ ਗੱਲ ਪੱਲੇ ਦੀ ਪੈ ਸਕਦੀ ਜਿੰਨਾ ਜਣ ਕੱਚੀ ਬਾੜੀ ਦੇ ਉੱਤੇ ਠੇਕ ਹੈ ਨਾ ਹਾਂਜੀ ਕਿ ਮਹਿਲ ਨੂੰ ਦੇਖਣ ਦੀ ਅਰਦਾਸ ਕਰਨੀ ਕਿ ਮਹਿਲ ਦੇਖ ਕੇ ਤਾਂ ਅਰਦਾਸ ਪਾਉਣੀ ਆ ਦੇ ਵਿੱਚ ਸੋਝੀ ਹੁੰਦੀ ਆ ਜੋ ਬੋਲੇ ਅਰਦਾਸ ਹੀ ਕੀਤੀ ਆ ਆ ਜੋ ਗੁਰਬਾਣੀ ਰਚੀ ਆ ਅਰਦਾਸ ਹੀ ਸਾਰੀ ਰਹਿ ਰਾਸ ਕਹ ਲੋ ਜਾਂ ਅਰਦਾਸ ਕਹ ਲੋ ਹਰ ਹਮਰੀ ਰਹਿ ਰਾਤ ਠੀਕ ਹੈ ਕਿਉਂਕਿ ਸਿਹਾਰੀ ਹੈ ਮਹਿਲ ਦੇਖੀ ਅਰਦਾਸ ਪਾਇ ਮਹਿਲ ਦੇਖ ਕੇ ਤਾਂ ਫਿਰ ਹਾਂ ਦੇਖਣ ਤੋਂ ਬਾਅਦ ਹੀ ਇਹ ਪ੍ਰਾਪਤੀ ਹੋਈ ਹੈ ਬੋਲਣ ਦੀ ਪਹਿਲਾਂ ਬੋਲਿਆ ਤਾਂ ਵੀ ਕਿ ਅਰਵ ਜੀ ਜੋ ਪਹਿਲਾਂ ਬੋਲਿਆ ਸੀ ਦੇਖਣ ਤੋਂ ਪਹਿਲਾਂ ਜੋ ਬੋਲਿਆ ਸੀ ਉਹ ਸਾਰਾ ਬੇਕਾਰ ਗਿਆ ਬੋਲਿਆ ਬਹੁਤ ਸੀ ਪਹਿਲਾਂ ਬੜਾ ਵਿੱਚ ਲਿਖਿਆ ਬਹੁਤ ਜ਼ਿਆਦਾ ਲਿਖਿਆ ਹੈ ਤੁਸੀਂ ਵੇਕਾਰ ਗਿਆ ਠੀਕ ਹੈ ਕਿਉਂਕਿ ਇਹਨਾਂ ਦੇ ਅਰਥ ਅੰਗਰੇਜ਼ੀ ਦੇ ਹਨ ਉਹ ਕਹਿੰਦੇ ਆ ਜੀ ਮੈਨੂੰ ਮਹਿਲ ਦਿਖਾ ਇਹ ਮੈਂ ਅਰਦਾਸ ਕਰਦਾ ਅਰਦਾਸ ਪਾਈ ਲਿਖਿਆ ਅਰਦਾਸ ਪਾਈ ਮਹਿਲ ਦੇਖ ਅਰਦਾਸ ਪਾਈ ਪਾਈ ਨਾ ਤੁਸੀਂ ਕਹੋ ਪਾਈ ਲਖੋ ਜਿਹੜੂ ਇਹ ਦੇ ਪੈਟਰਨ ਤੇ ਚੱਲੂਗਾ ਇਹ ਲੱਗੂਗਾ ਫਿਰ ਲਾਮ ਲੱਗੂਗੀ ਜਿਹੜੀ ਨੂੰ ਤੇ ਪਾਈ ਕਹਿੰਦੇ ਅੱਛਾ ਜੀ ਮਹਿਲ ਦੇਖੀ ਅਰਦਾਸ ਪਾਈ ਜੇ ਮੈਂ ਸ਼ਕਤੀ ਭਗਤੀ ਸੁਰਤੀ ਸਮਰਤੀ ਨਾ ਈੜੀ ਸਿਹਾਰੀ ਨਾਲ ਇਹ ਹਿੱਦੀ ਦੇ ਪੈਟਰਨ ਤੇ ਵੀ ਚੱਲੂਗਾ ਮਤਲਬ ਸਿਹਾਰੀ ਬਿਹਾਰੀ ਮੰਗੂ ਬੋਲੇਗੀ ਹਾ ਅਤੀ ਅਤੀ ਬਿਹਾਰੀ ਠੀਕ ਹੈ ਜੀ ਆਪਣੇ ਭਾਣੇ ਬਹੁਤਾ ਬੋਲੈ ਬੋਲਿਆ ਥਾ ਨਾ ਪਾਈ ਖਸਮ ਵੱਡਾ ਦਾਤਾਰ ਹੈ ਜੋ ਇੱਛੇ ਸੋ ਫਲ ਪਾਈ ਵਾ ਵਿਹਾ ਕਿਆ ਬਪੜਾ ਜਗਤੇ ਕੀ ਤਿਖ ਜਾਈ ਆਪਣੇ ਭਾਣੇ ਬਹੁਤਾ ਬੋਲੈ ਬਹੁਤ ਬੋਲਿਆ ਆਪਣੇ ਭਾਣੇ ਫਿਰ ਨਾ ਗ੍ਰੰਥ ਲਿਖਦੇ ਤੇ ਕਵਿਤਾ ਬੋਲਦੇ ਬੋਲਿਆ ਥਾ ਨਾ ਪਾਈ ਕਸਮੀ ਦੀ ਕਸੌਟੀ ਤੇ ਖਰਾ ਲੀ ਉਤਰਿਆ ਦਰਗਾਹ ਚ ਪਰਵਾਣ ਨਹੀਂ ਹੋਇਆ ਬੋਲਿਆ ਹੋਇਆ ਜਿਹੜੇ ਆਪਣੇ ਭਾਵੇਂ ਬੋਲਦੇ ਨੇ ਇਹ ਜਿਹੜੀ ਗੁਰਬਾਨੀ ਹੈ ਇਹ ਬੁਲਾਇਆ ਬੋਲਦਾ ਆਪਣੇ ਭਾਵੇਂ ਦੀ ਬੋਲਦਾ ਉਹ ਆਪਣੇ ਭਾਵੇਂ ਬੋਲਿਆ ਬਗੈਰ ਬੁਲਾਏ ਤੇ ਬਹੁਤਾ ਬੋਲਣਾ ਹੈ ਹੋਰ ਬੋਲਦੇ ਨੇ ਲੋਕ ਬੋਲਦੇ ਨੇ ਬੋਲਿਆ ਥਾਏ ਨਾ ਪਾਇ ਤੇ ਸਦਾ ਵੀ ਬੋਲੇਗਾ ਥਾਲੇ ਨਹੀਂ ਪਿਆ ਖਸਮ ਵੱਡਾ ਦਾਤਾਰ ਹੈ ਖਸਮ ਵੱਡਾ ਹੈ ਵੱਡਾ ਦਾਤਾਰ ਉਦੋਂ ਵੱਡਾ ਦਾਤਾ ਕੋਈ ਹੈ ਹੀ ਨਹੀਂ ਸ਼ਬਦ ਵੱਡਾ ਦਾਤਾਰ ਹੋਈ ਹੈ ਜੋ 600 ਬਲ ਭਾਈ ਉਤੋਂ ਦਾ ਜੋ ਬੰਦਣਾ ਮੰਗ ਲੋ ਜਿਹੜਾ ਫਲ ਉਤੋਂ ਮਿਲ ਸਕਦਾ ਹੋਰ ਕਿਤੋਂ ਨਹੀਂ ਮਿਲ ਸਕਦਾ ਕੋ ਜਿਹੜੇ ਹੋਰ ਕੋਈ ਨਹੀਂ ਦੇ ਸਕਦਾ ਕੁਝ ਉਤੋਂ ਬਲੂ ਜੋ ਕੁਝ ਮਿਲੂ ਹਾਂਜੀ ਐ ਖਸਮ ਇੱਥੇ ਨੂੰ ਕਿਹਾ ਜੀ ਹਾਂ ਜੀ ਬਾਬੀ ਹਾਂ ਕਿਆ ਬਪੜਾ ਕੀ ਤਖ ਜਾਈ ਪੀਆ ਦਾ ਕਿਤੇ ਨਹੀਂ ਪਿਆਸ ਦੀ ਕੀ ਗੱਲ ਹੈ ਤਾਂ ਦੋ ਬੂੰਦਾਂ ਨਾਲ ਲੱਜ ਜਾਂਦਾ ਇੱਕ ਬੂੰਦ ਨਾਲ ਇਹ ਸਾਰੇ ਸਫਾਰ ਦੀ ਪਿਆਸ ਜਾ ਸਕਦੀ ਹੈ ਕੋਲੋਂ ਤਾਂ ਐਡਾ ਬੜਾ ਬਾਬੀ ਹਾ ਮੰਨੂ ਕਿਹਾ ਹੈ ਜੀ ਇੱਥੇ ਇਹਨਾਂ ਨੂੰ ਬਾਬੀ ਅਜੇ ਤੱਕ ਇਸ ਤਰ੍ਹਾਂ ਹੀ ਲੱਗਦਾ ਜਿਹੜਾ ਪੰਛੀ ਹੈ ਉਹੀ ਹੈ ਪੰਛੀ ਦੀ ਗੱਲ ਚੱਲਦੀ ਹੈ ਮਰਬਾਨੀ ਦੀ ਆਤਮਿਕ ਪਿਆਸ ਦੀ ਗੱਲ ਚੱਲਦੀ ਹੈ ਨਾਲੇ ਪੰਛੀ ਨੂੰ ਪਿਆਸ ਸਰੀਰ ਦੀ ਹੁੰਦੀ ਹੈ ਇੱਥੇ ਆਤਮਿਕ ਦੀ ਪਿਆਸ ਦੀ ਗੱਲ ਹੈ ਕਬੀਰ ਜੀ ਨੇ ਦੱਸਿਆ ਤਾਂ ਹੈ ਨਾ ਵੈਸੇ ਮਨ ਪੰਖੀ ਭਇਓ ਹਾਂ ਉਡ ਉਡ ਦੈ ਦਿਸ ਜਾਏ ਵੀ ਇਹ ਮਨ ਹੈ ਪੰਖੀ ਹੈ ਹਾਂ ਜੀ ਹੈ ਜੀ ਤਿਖ ਜਾਈ ਮਹੱਲਾ ਤੀਜਾ ਬਾਬੀ ਹਾ ਰਹਿਣ ਬੋਲਿਆ ਸਹਜੇ ਸਤ ਸੁਭਾਈ ਇਹ ਜਲ ਮੇਰਾ ਜਿਉ ਹੈ ਜਲ ਬਿਨ ਰਹਿਣ ਨਾ ਜਾਏ ਜਦੋਂ ਵੀ ਆ ਬੋਲੇ ਆ ਨਾ ਜਦ ਉਹਦੀ ਰਾਤ ਟੁੱਟ ਗਈ ਉਹ ਫੱਟੀ ਚਾਨਣ ਹੋ ਗਿਆ ਜਦ ਚਾਨਣ ਹੋ ਗਿਆ ਰਾਤ ਤਾਂ ਰਹੀ ਦੀ ਪਰ ਸੂਰਜ ਵੀ ਨਹੀਂ ਚੜਿਆ ਜਦ ਫਿਰ ਸੱਚ ਸੁਪਾਈ ਫਿਰ ਸੱਚੇ ਕੇ ਬੋਲੇਆ ਸੱਚ ਨਾਲ ਜੁੜ ਕੇ ਬੋਲੇਆ ਅੱਜ ਦੀ ਭੁੱਖ ਰਾਤੇ ਬੋਲ ਫਿਰ ਸੱਚ ਦੀ ਉਹ ਭੁੱਖ ਆ ਫਿਰ ਮਾਇਆ ਦੇਖੋ ਸੱਚ ਸੁਪਾਈ ਸੱਚ ਦੀ ਭਾਵਨਾ ਨੂੰ ਸੱਚ ਦੀ ਪ੍ਰਿਆਸ ਹੈ ਸੱਚ ਨੂੰ ਉੱਗੀ ਲੱਗਾ ਕੋਹ ਜਦ ਸੱਚ ਵਾਸਤੇ ਬੋਲਦਾ ਬਬੀ ਹਾ ਆਪਣਾ ਲੋਭ ਦੇ ਹੋ ਗੁਣ ਗਾਵਾਂ ਤੇ ਰਾਤ ਦੁਰਕ ਚਾਹੇ ਹੋ ਨਾਮ ਦਾ ਨਾਮ ਲੈਤਾ ਜੀਵ ਇਹ ਜਲ ਮੇਰਾ ਜਿਉ ਹੈ ਫਿਰ ਇਹ ਬੋਲਿਆ ਇਹ ਜਿਹੜਾ ਜਲ ਹੈ ਲੋ ਮੇ ਕੋ ਰਾਮ ਉਦਕ ਇਹੀ ਤਾਂ ਜੀਵਨਾ ਮੇਰਾ ਮੈਂ ਆਪਣਾ ਜੀਵਨ ਮੰਗਦਾ ਅਸਰ ਤੇ ਜਲ ਨਹੀਂ ਮੰਗਦਾ ਮੈਂ ਜੀਵਨ ਬੁਝਦਾ ਇਹ ਜਲ ਮੇਰਾ ਜਿਉ ਹੈ ਮੈਂ ਸੱਚ ਜੀਵਨ ਮੰਗਦਾ ਹਾਂ ਜਲ ਜੋ ਹੈ ਸੱਜੀਵਨ ਹੈ ਇਹ ਆਪਣਾ ਦਾ ਅਸਲ ਤੇ ਨਾ ਕੋ ਉਪਰਤ ਬੁਝਦਾ ਨਾ ਤਾਂ ਕਿ ਇਹਨੂੰ ਪੀ ਕੇ ਅਮਰ ਹੋ ਜਬ ਇਹ ਹੈ ਜਲ ਬਿਨ ਰਹਿਣਾ ਨਹੀਂ ਜਾਈ ਜਲ ਤੇ ਬਿਨ ਜੰਤੀ ਨਹੀਂ ਹੈ ਜਿਸ ਤਾਰੀ ਰਹਾ ਜਾ ਸਕਦਾ ਜਲ ਬਿਨ ਰਹਿਣਾ ਨਹੀਂ ਜਾਈ ਨਹੀਂ ਬਚਿਆ ਜਾ ਸਕਦਾ ਹਾਲਤੋਂ ਜੀ ਰਾਜੂ ਵੀ ਸਮਝੂਗਾ ਕੋਟੇ ਲਾਬੇ ਕੋਟੇ ਪਸਾਰ ਚੱਲਣਾ ਜੁੜ ਕੇ ਹੀ ਰਹਿ ਸਕਦਾ ਹੈ ਚਲਦੇ ਨਾਲ ਜੁੜਿਆ ਰਹੂ ਸ਼ਬਦ ਨਾਲ ਜੁੜਿਆ ਰਹੂ ਤੇ ਜੀਵਨ ਚੱਲਦਾ ਰਹੂ ਜਿੱਥੇ ਮਰ ਜਾਊ ਆਖਰ ਜੀਵਨ ਜਿੱਥੇ ਮਰ ਜਾਣਾ ਆਖਣ ਉਹ ਖਸਾ ਚੜੂ ਜਰੂਰ ਆਖਣ ਪਰ ਵਿਛੜਿਆ ਦਾ ਮੌਤ ਵੀ ਹੈ ਹਾਂਜੀ ਇਹ ਜਿਹੜਾ ਲਿਖਿਆ ਬਾਬੀ ਹਾ ਪਿੰਨੀ ਰੈਣੀ ਬੋਲਿਆ ਇਹ ਅਜੇ ਅੰਦਰ ਚੰਨਣਾ ਨਹੀਂ ਹੋਇਆ ਜੀ ਜੀ ਜਨਮ ਦਾ ਹੈ ਹੋ ਗਿਆ ਨਾਮ ਨਹੀਂ ਮਿਲਿਆ ਨਾਮ ਪਦਾਰਥ ਨਹੀਂ ਮਿਲਿਆ ਹਾਂ ਜੋ ਬੋਲਿਆ ਨਾ ਹੋ ਤੇ ਮੈਨੂੰ ਉਹ ਦੇ ਉਹਦੇ ਬਿਨਾ ਮਰ ਜੂਗਾ ਬਚਿਆ ਨਹੀਂ ਜਾ ਸਕਦਾ ਇਹ ਗਿਆਨ ਇਹ ਨਾ ਹੋ ਸਮਝ ਨਹੀਂ ਸਮਝ ਨਹੀਂ ਠੀਕ ਹੈ ਹੁਣ ਅੰਮ੍ਰਿਤ ਦੀ ਅਰਦਾਸ ਕਰ ਰਹੇ ਹਾਂ ਠੀਕ ਹੈ ਬਾਬਾ ਜੀ ਭਿੰਨੀ ਰਹਿਣੀ ਹਾਂ ਹਰ बाबा जी, ਹੋ ਗਿਆ बाबी हा ਹਾ ਪਿੰਨੀ ਰੈਣੀ ਬੋਲਿਆ ਸਹਜੇ ਸੱਚ ਸੁਭਾਈ ਇਹ ਜਲ ਮੇਰਾ ਜਿਉ ਹੈ ਜਲ ਬਿਨ ਰਹਿਣ ਨਾ ਜਾਈ ਗੁਰ ਸ਼ਬਦੀ ਜਲ ਪਾਈ ਹੈ ਵਿੱਚੋਂ ਆਪ ਗਵਾਈ ਗੁਰ ਸ਼ਬਦੀ ਜਲ ਪਾਈ ਹੈ ਜਿਹਨ ਜਲ ਆਇਆ ਦੁਰਪਦੇਸ਼ ਤੋਂ ਗੁਰਬਣੀ ਚ ਮਿਲਣਾ ਗਿਆਨ ਅਪਰਤ ਗਿਆਨ ਅਪਰਤ ਗੁਰਬਣੀ ਜੇ ਮਿਲਣਾ ਸੱਚ ਆਤਮ ਗਿਆਨ ਨੂੰ ਜਿਹੜਾ ਹੈ ਆਤਮ ਗਿਆਨ ਦੀ ਗੱਲ ਹੈ ਆਤਮ ਗਿਆਨ ਆਤਮ ਧਿਆਨ ਤੱਕ ਪਹੁੰਚੀਦਾ ਹੈ ਆਦਮ ਧਿਆਨ ਤੇ ਗਿਆਨ ਹੁੰਦਾ ਆਦਮ ਵਿੱਚੋਂ ਆਪ ਗਵਾਈ ਵਿੱਚੋਂ ਆਪਣੀ ਮਰਜ਼ੀ ਦੀ ਹੈ ਗੁਰਬਾਣੀ ਚ ਉਹਦੀ ਵਿਚਾਰ ਕਰਦੀ ਆਪਣੀ ਮਰਜ਼ੀ ਦੇ ਅਰਥ ਨਹੀਂ ਕਰ ਸਕਦੇ ਆਪਣੇ ਬੁੱਤ ਨਹੀਂ ਘਸੋਰ ਸਕਦੇ ਵਿੱਚ ਹੋਰ ਤਾਂ ਗੁਰਬਾਣੀ ਚ ਦੇਖਣਾ ਚਾਹਤੇ ਗੁਰਬਾਣੀ ਇਹ ਤੇ ਲਈ ਤੇ ਅਸੀਂ ਹਟਵੇਂ ਦਾ ਨਹੀਂ ਅਰਥ ਕਰ ਲੈਤੇ ਜੇ ਹਟ ਰਹਿਣ ਹੋ ਜਾਵਣਗੇ ਤੇ ਗੁਰਬਾਣੀ ਉਹ ਸਾਨੂੰ ਰੋਕ ਦੂਗੀ ਵੀ ਤੇ ਇੱਧਰੋਂ ਨਹੀਂ ਜਾ ਸਕਦੇ ਤੁਸੀਂ ਗੁਰਬਾਣੀ ਦੇ ਅਰਥਾਂ ਨੂੰ ਗੁਰਬਾਣੀ ਚ ਵੀ ਠੀਕ ਨੇ ਸੋ ਨਾਨਕ ਜਿਸ ਬਿਨ ਚਸਾ ਨਾ ਜੀਵਦੀ ਸੋ ਸਤਿਗੁਰ ਦਿਆ ਮਿਲਾਈ ਜਿਦੈ ਬਿਨਾ ਇਕਲ ਜੀਵਨ ਨਹੀਂ ਸੀ ਚੱਲ ਸਕਦਾ ਉਹੋ ਜਿਹੜਾ ਹੈ ਨਾਮ ਉਪਰਤ ਸਤਿਗੁਰੂ ਨੇ ਮਿਲਾਟਾ ਉਹਦੇ ਨਾਲ ਜੋੜ ਦਿੱਤਾ ਸੋ ਸਤਿਗੁਰਿ ਮਿਲਾਈ ਅਤਬੁਲ ਨੇ ਮਲਾਤ ਆ ਉਹਨਾਂ ਨੂੰ ਜੋੜ ਲਿਆ ਠੀਕ ਹੈ ਸਤਿਗੁਰੂ ਵੀ ਗਿਆਨ ਸਰੂਪ ਹੈ ਜੀ ਬਾਜ ਸਤਗੁਰ ਤੇ ਨਾਮ ਪਾਇਆ ਜਾਏ ਨਾ ਹਾਂ ਨਾਮ ਉਹਦੇ ਖੰਡ ਪਤਾਲ ਅਸੰਖ ਹੈ ਗਣਤ ਨਾ ਹੋਈ ਤੂੰ ਕਰਤਾ ਗੋਬਿੰਦ ਤੁਝ ਸਿਰਜੀ ਤੁਦੈ ਗੁਈ ਖੰਡ ਪਤਾਲ ਨੇ ਜਿਹੜੇ ਇਹ ਤਾਂ ਅਸੰਖ ਨੇ ਇਹ ਨਾਲ ਦੀ ਗੱਲ ਨਹੀਂ ਦਸੀ ਜਾ ਸਕਦੀ ਮੈਂ ਨਹੀਂ ਦੱਸ ਸਕਦਾ ਤੂੰ ਕਰਤਾ ਗੋਬਿੰਦ ਤੂੰ ਜੀਰ ਜੀ ਤੂੰ ਦਾ ਗੋਬਿੰਦ ਹੈ ਗੋਬਿੰਦ ਤੂੰ ਕਰਤਾ ਮੈਂ ਐ ਉਹ ਸਾਰੀ ਸ੍ਰਿਸ਼ਟੀ ਬਣਾਈ ਰੱਖੀ ਹੈ ਸ੍ਰਿਸ਼ਟੀ ਹੈ ਕਈ ਐ ਫਿਰ ਉਹ ਵੀ ਮਿਕਸ ਕਰ ਦੇਣੀ ਹੈ ਗਾਇਬ ਕਰ ਦੇਣੀ ਹੈ ਕੋਈ ਦਾ ਬਦਲੋ ਗਾਇਬ ਕਰ ਦੇਣੀ ਠੀਕ ਹੈ ਸਾਥੋਂ ਵਿੱਚੋਂ ਇਹਦੇ ਕੱਢ ਲੈਣੀ ਅੱਛਾ ਹਲਾ ਕਾਲ ਹੈ ਇਹ ਸਾਰੀ ਉਹ ਫਿਰ ਰੂਪ ਹੋ ਜਾਣ ਤੇਰੇ ਚ ਸਮਾ ਜਾਣੀ ਹੈ ਇੱਥੇ ਗੋਬਿੰਦ ਦਾ ਭਾਗ ਫਿਰ ਪਰਮੇਸ਼ਰ ਆ ਜੀ ਤੂੰ ਕਰਤਾ ਗੋਬਿੰਦ ਕੋ ਕਰਤਾ ਆ ਗਿਆ ਗੋਬਿੰਦ ਨਾਲ ਨਾ دریا ਜਦਾਂ ਲੱਗ ਗਿਆ ਨਾ ਸੂਦਲ ਦੇ ਨਾਲ ਜੁੜ ਗਿਆ ਫਿਰ ਸੁੰਦਰੇ ਸ਼ੁਰੂ ਹੋ ਜਾਂਦਾ ਕਿਸਮ ਦਾ ਚਾਹੇ ਨੌ ਦਾ دریا ਵੀ ਆਪਾਂ ਕਹਿੰਦੇ ਆ ਪਰ ਪਾਣੀ ਦਾ ਲਿਖ ਤਾਂ ਇੱਕੋ ਹੀ ਹੈ ਨਾ ਧੁਰਪੇ ਕਰਤਾ ਪੁਰਖ ਨੇ ਲਿਖਿਆ ਇੱਥੇ ਕਰਤਾ ਗੋਬਿੰਦ ਲਿਖਤਾ ਇਹੀ ਹੈ ਬਾਕੀ ਤਾਂ ਹਾਂ ਦੀ ਉਹ ਗੱਲ ਹੋ ਰਹੀ ਹੈ ਹਾਂ ਪਰਮੇਸ਼ਰ ਦੀ ਗੱਲ ਹੈ ਕੋਈ ਨਹੀਂ ਫਿਰ ਠੀਕ ਹੈ ਫਿਰ ਪਰਮੇਸ਼ਰ ਇਕੋ ਕਰਕੇ ਬੁੱਢੀ ਹੋਇਆ 84 ਲੱਖ ਮੇਦਨੀ ਤੁਝ ਤੇ ਹੋਈ ਇੱਕ ਰਾਜੇ ਖਾਨ ਮਲੂਕ ਕਹਿ ਕਹਾਵੇ ਕੋਈ 84 ਲੱਖ ਜੂਨ ਹੈ ਪਰ ਧਰਤੀ ਹੈ ਮਿੱਟੀ ਲੱਗੀ ਹੋਈ ਹੈ ਜਿਹੜੀ ਤੁਜੀ ਤੇ ਹੋਈ ਤੇ ਪੈਦਾ ਹੋਈ ਹੈ ਸੱਚੇ ਤੇ ਪਗਨਾ ਤੇ ਤੇਰਾ ਉੱਪਰ ਪੀਤਾ ਹੋਇਆ ਸੀ ਤੇ ਅੰਬਰ ਦੇ ਵਿੱਚੋਂ ਇਹ ਪੈਦਾ ਕੀਤੀ ਸੱਚੇ ਤੇ ਪਗਨਾ ਤੇ ਆਪਗਨਾ ਤੇ ਜਲ ਹੋਏ ਤਾਂ ਇਹ ਬਰਦਾ ਹੋਇਆ ਤਾਂ ਉਸੇ ਰੂਪ ਚ ਫੇਰ ਇਹਨੂੰ ਸ਼ਕਤੀ ਰੂਪ ਚ ਫੇਰ ਆਪਣੇ ਵਿੱਚ ਲੀਡ ਕਰ ਲੈਣ ਤੇ ਰਾਜੇ ਖਾਨ ਬਲੂਕ ਕਹਾਂ ਕਹੋਵੇਂ ਕੋਈ ਕੋਈ ਆਪਣੇ ਆਪ ਨੂੰ ਰਾਜਾ ਕਹੁੰਦਾ ਕੋਈ ਖਾਨ ਬਲੂਕ ਕਹੁੰਦਾ ਕਹਾਈ ਜਾਣ ਇਹ ਹੰਕਾਰ ਦੇ ਪ੍ਰਤੀਕ ਨੇ ਸਾਰੇ ਪਰ ਸੱਚ ਇਹ ਹੈ ਆ ਸਭ ਤੈਨੂੰ ਤੁਹਾਡਾ ਜੀਤਾ ਤਾਂ ਉਹ ਆਪਣੇ ਵਿੱਚ ਲੀਡ ਕਰ ਲੈਂਦਾ ਰਾਜੇ ਦਾ ਅਸਲ ਹੈ ਨਹੀਂ ਆਪਣੇ ਆਪ ਨੂੰ ਬੰਦਦੇ ਨੇ ਖਾਨ ਆਪਣੇ ਆਪ ਨੂੰ ਬੰਦਦੇ ਨੇ ਸਹੀ ਇੱਕ ਸ਼ਾਸਦਾਵੇਂ ਸੰਚਤਨ ਦੂਜੇ दूजे पत खोई, एक ਇੱਕ ਮੰਗਤੇ ਸਭਨਾ ਸਿਰ ਸੋਈ ਅ ਸ਼ਾਸਦਾ ਉਹਨੇ ਆਪਣੇ ਆਪ ਨੂੰ ਕੌਣ ਦੇ ਦਿਖਾ ਆ ਤੁਹਾਨੂੰ ਸੰਸਾਰੀ ਤੁਹਾਨੂੰ ਇਕੱਠਾ ਕਰਕੇ ਦੂਜੇ ਪਤ ਖੋਈ ਇਹ ਦੂਜੇ ਪਾਸੇ ਲਾਗੇ ਮਾਇਆ ਵਾਲੇ ਉੱਥੇ ਦਰਗਾਹ ਜੀ ਪਸਦੀਆਂ ਨਾਲ ਦੇ ਨਾ ਬਲੇ ਸਰਦਾਰੀ ਦਾ ਨਹੀਂ ਪਤ ਖੋਈ ਹੋਈ, ਪਤ ਦੀ। ਇੱਕ ਦਾਤੇ, ਇੱਕ ਤੇ ਇੱਕ ਦਾਦੇ ਦੇ ਇੱਕ ਬੁੰਗ ਤੇ। ਸਭ ਨਾਲ ਸਿਰ ਸੋਈ। ਕੁੱਤੇ ਸਾਰਿਆਂ ਦੇ ਉਹੀ ਦਾਤਾ ਹੈ, ਦਾਤਾਰ। ਫਟਾ ਦਾਤਾ ਉਹੀ ਹੈ। ਨਾਮ ਨਾਲ ਵੀ ਦਾਤਾ ਹੈ, ਨਾਮ ਕਰਕੇ ਵੀ ਦੂਏ ਦਾਤੇ ਵੀ। ਚਾਹੇ ਦਾਤੇ ਦੇ ਰੋਗ ਦੇ ਦਾਸਤਾਨ ਵਾਲੇ ਨੇ, ਜਾਂ ਨਾਮ ਨਾਲ ਨੇ ਕਿਸ ਸੰਸਾਰੀ ਦਾਤਾਰ ਬਣੇ। ਠੀਕ ਹੈ ਜੀ। ਨਾਮ ਪੀਹਾਵਲ ਹੋਈ ਕੂੜ ਨਿਕੁੱਟੇ ਨਾਨਕਾ ਸੱਚ ਕਰੈ ਸੋ ਹੋਈ ਬਿਨਾ ਬਲ ਬਿਨਾ ਬਜ਼ਾਰੀ ਲੋਕ ਨੇ ਤੇ ਸਾਰੇ ਬਾਜ਼ਾਰ ਚ ਫਿਰਦੇ ਜਿਹਦੇ ਦਾਦੇ ਨੇ ਮੁੰਡੇ ਨੇ ਸ਼ਾਹ ਸੰਸਾਰ ਦੇ ਬਾਜ਼ਾਰ ਬਾਜ਼ਾਰੀ ਲੋਕ ਨੇ ਪੀਹਾਵਲ ਹੋਈ ਬਹੁਤ ਭੈ ਭੀ ਤੋੜ ਲਊਗਾ ਹੁਣ ਵੀ ਭੈਜਦੇ ਬਹੁਤ ਭੈ ਆਊਗੀ ਬਹੁਤ ਬੁਰੀ ਬਣੂਗੀ ਆਖਰ ਤੇ ਉਹਨੇ ਖੁਰਟਿਆ ਨਾਲ ਕਾ ਸੱਚ ਕਰੇ ਸੋ ਹੋਈ ਆ ਕੂੜਾ ਸਾਰਾ ਖੋਟਾ ਸਭ ਤੋਂ ਜਾਣਾ ਨਹੀਂ ਰਾਜੇ ਰਹਿਣਾ ਤੁਸੀਂ ਉਹ ਵੀ ਹਿੱਟ ਹੋਇਆ ਕਿ ਸਭ ਧੂਪੇ ਬਲਏ ਹੈ ਸਮੋਦੇ ਮੋਦੇ ਤੇ ਰਾਜ ਕਿਸੇ ਨੇ ਪੁੱਛਣਾ ਬਦੀ ਸੱਚ ਕਰੇ ਸੋ ਹੋਈ ਉੱਡਾ ਕੀ ਜੇ ਕੀ ਹੋ ਰਿਹਾ ਜੋ ਸੱਚ ਕਰਦਾ ਉਹੀ ਹੋ ਰਿਹਾ ਕੂੜ ਕੋ ਜਿਲੀ ਕਰ ਸਕਦਾ ਕੂੜ ਤਾਂ ਆਪੇ ਡੀਜ਼ਲ ਦਾ ਕੂੜੇ ਖੁੱਟੇ ਕੂੜਤਾ ਛੋਟਾ ਸਾਬਤ ਹੋ ਜਾਂਦਾ ਸਮੇਂ ਨਾਲ ਕੂੜ ਕਾਲ ਦੇ ਵਸਾ ਕੂੜ ਸਮੇਂ ਨਾਲ ਕੂੜ ਅੱਪੀ ਜਿੰਦਾਂ ਆਪਣੇ ਬੋਝ ਨੂੰ ਦੁਨੀਆ ਗਿਆਨਬਾਨ ਹੋ ਜਾਂਦੀ ਹੈ ਕੂੜੀਆਂ ਬੱਤਾਂ ਝੂਠੀਆਂ ਸਾਬਤ ਹੋ ਜਾਂਦੀਆਂ ਨੇ ਦੁਨੀਆ ਦਾ ਗਿਆਨ ਵੱਧ ਜਾਂਦਾ ਹੈ ਬੱਤਾਂ ਜਿਹੜੀਆਂ ਨੇ ਆਪੇ ਝੂਠੀਆਂ ਹੋ ਕੇ ਸਾਬਤ ਹੋ ਕੇ ਲੋਕ ਮੰਨਣ ਤੇ ਹੱਟ ਜਾਂਦੇ ਨੇ ਨਵੀਂ ਉਹ ਫਿਰ ਪੈਦਾ ਹੋ ਜਾਂਦੀਆਂ ਨੇ ਫਿਰ ਆਖਰ ਸੱਚ ਤੇ ਜਾ ਕੇ ਉਦੋਂ ਗਾਂ ਨਹੀਂ ਕੋਈ ਜਾ ਸਕਦਾ ਸੱਚ ਤੇ ਜਾ ਕੇ ਬ੍ਰਾਮ ਲੱਗਦਾ ਇੱਥੇ 12ਵੀਂ ਪਾੜੀ ਸਮਾਪਤੀ ਹੈ ਜੀ